ਜੇ ਲੋਕ ਮਹੱਲਾ ਤੀਜਾ ਭਗਤੀ ਕਰੇ ਮਰ ਜੀਵੜੇ ਗੁਰਮੁਖ ਭਗਤੀ ਸਦਾ ਹੋਏ ਉਹਨਾਂ ਕੋ ਤੁਰ ਭਗਤੀ ਖਜ਼ਾਨਾ ਬਖਸ਼ਿਆ ਮੇਟ ਨਾ ਸਕੈ ਕੋਈ ਭਗਤੀ ਕਰਿਆ ਮਰ ਜੀਵੜੇ ਮਰ ਜੀਵੜੇ ਭਗਤੀ ਕਰਦੇ ਨੇ ਜਿਉਂਦਾ ਹੋਣਾ ਉਹੀ ਭਗਤੀ ਕਰਣਗੇ ਮਰਿਆ ਮਰਿਆ ਉਹ ਭਗਤੀ ਕਰਦੇ ਜਿਹਨਾਂ ਦੀ ਇੱਛਾ ਉਹੀ ਤਸਦੀਕ ਕਰ ਰਹੇ ਨੇ ਉਹੀ ਕਰਦੇ ਜੀ ਜਿਹਨਾਂ ਨੇ ਮਰਨ ਕਬੂਲ ਕਰ ਲਿਆ ਹਾਂਜੀ ਠੀਕ ਹੈ ਜੀ ਗੁਰਮੁਖੀ ਭਗਤੀ ਸਦਾ ਹੋਏ ਉਹ ਗੁਰਮੁਖੀ ਭਗਤੀ ਕਰਦੇ ਸਦਾ ਗੁਰਮਖਾੜੀ ਭਗਤੀ ਸਦਾ ਹੀ ਗੁਰਮਖਾੜੀ ਭਗਤ ਅਸਲ ਹੈ ਬਾਕੀ ਭਗਤੀ ਸਾਰੀ ਭਗਤੀਆਂ ਹੈ ਦਰਗਾਹ ਜੀ ਕਬੂਲੇ ਦੀਆਂ ਨੂੰ ਗੁਰਮੁਖੀ ਭਗਤਾਂ ਦੀ ਸਦਾ ਹੀ ਹੁੰਦੀ ਰਹਿੰਦੀ ਹੈ ਤਸਾਦ ਆ ਮਤਲਬ ਇਹ ਹੈ ਗੁਰੂ ਕੋ ਮਰਦਾ ਹੀ ਨਹੀਂ ਹੈ ਇੱਕ ਵਾਰ ਭਗਤੀ ਸ਼ੁਰੂ ਹੋਗੀ ਫਿਰ ਬੰਦ ਹੁੰਦੀ ਹੋਈ ਦੀ ਇਹ ਬੰਦ ਤਾਂ ਮਰੇ ਤੇ ਹੁੰਦੀ ਹੈ ਕੋਈ ਜੂ ਮਰ ਜਾਂਦਾ ਹੋ ਜਾਂਦੀ ਹੈ ਠੀਕ ਹੈ ਜੀ ਉਹਨਾਂ ਕੋ ਧੁਰ ਭਗਤੀ ਖਜ਼ਾਨਾ ਬਖਸ਼ਿਆ ਮੀਟ ਨਾ ਸਕਿਆ ਕੋਈ ਉਹ ਜਿਹੜੇ ਗੁਰੂ ਤੇ ਨੇ ਉਹਨਾਂ ਨੂੰ ਤਾਂ ਧੁਰੋਂ ਭਗਤੀ ਖਜ਼ਾਨਾ ਮਿਲਿਆ ਹੋਇਆ ਹੁੰਦਾ ਆਪਣੀ ਮਰਜ਼ੀ ਦੀ ਭਗਤੀ ਨਹੀਂ ਕਰਦੇ ਹਾਂ ਤੇ ਗੁਰਬਾਣੀ ਤੁਰਕੀ ਨੇ ਭਗਤ ਬਣਾ ਮੋਢੂ ਬੈਠਣੇ ਬਾਕੀ ਦਾ ਸਿਆਣੇ ਆਪਣੀ ਆਪਣੀ ਬੱਤਰ ਨਾਲ ਭਗਤੀ ਕਰਦੇ ਨੇ ਪਰ ਮੋ ਕਰਦੇ ਤਾਂ ਗੁਰਮੱਤ ਲਈ ਜਾਂਦੇ ਨੇ ਲਈ ਜਾਂਦੇ ਨੇ ਕਿਤੇ ਭੁਗਦੀ ਆ ਮੱਤ ਉੱਚੇ ਤੇ ਉੱਚੀ ਮੱਤ ਹੈ ਠੀਕ ਹੈ ਜੀ ਇਹ ਕਰ ਇਹ ਲੈਂਦਾ ਹੀ ਰਹਿੰਦੇ ਨੇ ਮਤਲਬ ਭਗਤੀ ਉੱਭੀ ਹੋਈ ਰਹਿੰਦੀ ਹੈ ਇਹਨੂੰ ਕੋਈ ਮਿਟ ਨਹੀਂ ਸਕਦਾ ਇਹਦੇ ਕੋਈ ਵਜ਼ਨ ਨਹੀਂ ਪਾ ਸਕਦਾ ਭਗਤੀ ਦੇ ਵਿੱਚ ਠੀਕ ਹੈ ਜੀ ਮਿਲਿਆ ਹੋਇਆ ਉਹਨੂੰ ਕੌਣ ਮਿਟਾ ਦੂਗਾ ਕੌਣ ਵਜ਼ਨ ਪਾ ਦੂਗਾ ਉਹਦੇ ਵਿੱਚ ਲੋਕਾਂ ਨੇ ਸਰੀਰ ਕਰਕੇ ਉਹਨਾਂ ਦੇ ਵਿੱਚ ਅਲੱਗ ਕਰਦੇ ਭਾਵੇਂ ਸਰੀਰ ਤੋਂ ਆਤਮਾ ਨੂੰ ਅਲੱਗ ਕਰਤਾ ਪਰ ਭਗਤੀ ਫਿਰ ਵੀ ਨਹੀਂ ਬੰਦ ਹੋਈ ਭਗਤੀ ਆਤਮਾ ਨੇ ਕਰਦੀ ਹੈ ਸਰੀਰ ਨਹੀਂ ਕਰਦੀ ਇਹ ਜੇ ਬੰਦ ਹੋਊਗੀ ਕਿ ਭਾਵੇਂ ਪਾਸ਼ਾ ਬੰਦ ਹੋਊਗੀ ਹੁੰਦੀ ਭਗਤੀ ਇਹ ਆ ਪਰਮਗੱਦ ਰਹਿਣੇ ਭਗਤੀ ਮਰ ਤੋਂ ਬਾਅਦ ਵੀ ਚਾਲੂ ਰਹਿੰਦੀ ਹੁੰਦੀ ਹੈ ਇਹ ਠੀਕ ਹੈ ਜੀ ਜੀਦ ਤੋਂ ਬਾਅਦ ਵੀ ਚਾਲੂ ਰਹਿਣੀ ਹੁੰਦੀ ਹੈ ਸੇਖ ਜੀ ਗੁਣ ਨਿਧਾਨ ਮਨ ਪਾਇਆ ਏਕੋ ਸੱਚਾ ਸੋਏ ਨਾਨਕ ਗੁਰਮੁਖੀ ਮਿਲ ਰਹੇ ਫਿਰ ਵਿਛੋੜਾ ਕਦੇ ਨਾ ਹੋਏ ਗੁਣ ਦਾ ਅਨੁਭਵ ਪਾਇਆ ਗੋੜਾ ਨਾ ਨਾਨ ਪਾਲਿਆ ਸਤਿਗਿਆਨ ਪਾਲਿਆ ਬਵੇਕ ਗੁਣ ਦਾ ਅਨੁਭਵ ਪਾਇਆ ਏਕੋ ਸੱਚਾ ਸੋਏ ਕੋਈ ਅਬਵੇਕ ਖਰਿਆਂ ਦੇ ਵਿੱਚ ਸੱਚਾ ਉਹ ਪਾਲਿਆ ਨੇ ਗੁਣ ਦਾ ਆ ਪਾਇਆ ਏਕੋ ਸੱਚਾ ਸੋਏ ਨਾਣ ਕੋ ਗੁਰਮੁਖ ਮਿਲਣਾ ਫਿਰ ਵਿਛੋੜਾ ਕਦੇ ਫਿਰ ਕਦੇ ਵਿਛੜਦਾ ਹੀ ਨਹੀਂ ਮਿਲੇ ਹੋਏ ਜੇ ਵਿਛੜਾਂਗੇ ਤਾਂ ਭਗਤੀ ਛੁੱਟੂਗੀ ਜੇ ਵਿਛੜ ਗਏ ਜਿੰਨਾ ਚਿਰ ਵਿਛੜਦੇ ਨਹੀਂ ਭਗਤੀ ਚਾਲੂ ਆ ਬਿਲਾ ਕੇ ਰੱਖਣ ਨਾਲ ਰੋਏ ਭੁੱਗੀਏ ਰੱਖਦੀ ਐ ਇੱਕ ਕਰਕੇ ਰਸਦੀ ਐ ਹਾਂਜੀ ਮਹੱਲਾ ਕਿਆ ਉਹ ਕਰੇ ਵਿਚਾਰ ਸ਼ਬਦ ਸਾਰਨਾ ਜਾਣਈ ਵਿਖ ਭੂਲਾ ਗਾਵਾਰ ਸਤਗੁਰ ਦੀ ਸੇਵਾ ਹੀ ਨਹੀਂ ਜੀਨੇ ਕੀਤੀ ਸਤਗੁਰ ਦੇ ਬਾਣੀ ਚਲਿਆ ਕਿਆ ਕਰੇ ਵਿਚਾਰ ਉਹ ਵਿਚਾਰ ਵੀ ਕੀ ਕਰ ਲੂ ਗੁਰਬਾਣੀ ਦੀ ਵਿਚਾਰਾਣੇ ਕੀ ਕਰਦੀ ਉਹਦੇ ਅੰਦਰ ਵਿਚਾਰ ਪਤਾ ਹੀ ਨਹੀਂ ਹੋਇਆ ਹੂੰ ਹੂੰ ਸ਼ਬਦ ਸਾਰਨਾ ਜਾਣਣੀ ਵਿਖ ਭੂਲਾ ਗਾਵਾਰ ਔਰ ਸ਼ਬਦ ਜਿਹੜਾ ਉਪਦੇਸ਼ ਹੈ ਇਹਦੀ ਸਾਰ ਨਹੀਂ ਜਾਣਦਾ ਇਹਦੇ ਵਿੱਚ ਕੀ ਗੁਣ ਨੇ ਇਹਦੇ ਵਿੱਚ ਕੀ ਉਹ ਅੰਮ੍ਰਿਤ ਰੋਗ ਇਹਦੇ ਵਿੱਚ ਸਮਾਇਆ ਹੋਇਆ ਉਹ ਸਾਰ ਅੰਮ੍ਰਿਤ ਰੂਹੀ ਜਾਣਦਾ ਤੇ ਜਾਣੀ ਇਹ ਅੰਮ੍ਰਿਤ ਪੂਰਾ ਸਵਾਰ ਤਾਂ ਆਇਆ ਦਿਸਦੇ ਮਨ ਭੁੱਲਿਆ ਫਿਰਦਾ ਗਵਾਰ ਹੈ ਕੀਮਤ ਨੂੰ ਜਾਣਿਆ ਉਹਨੇ ਕੁਰਬਾਨੀ ਦੀ ਠੀਕ ਹੈ ਜੀ ਅਗਿਆਨੀ ਅੰਤਭਵ ਕਰਮ ਕਮਾਵੇ ਦੂਜੇ ਭਾਇ ਪਿਆਰ ਹਨ ਹੋਂਦਾ ਆਪ ਗਣਾਏ ਦੇ ਜੰਮ ਮਾਰ ਕਰੇ ਤਿੰਨ ਖੁਆਰ ਉਹ ਗਿਆਨੀ ਹੈ ਉਹਨੇ ਕਭ ਕਰਦਾ ਹਨਾ ਹੋਇਆ ਕੰਮ ਕਰੀ ਜਾਂਦਾ ਦੂਜੇ ਭਾਇ ਪਿਆਰ ਮਾਇਆ ਦੇ ਨਾਲ ਪਿਆਰ ਹੈ ਪਾਲਣੇ ਸ਼ਰੀਰ ਨਾਲ ਪਿਆਰ ਹੈ ਬਾਹਰ ਕਰਕੇ ਸੱਚ ਮੰਨਦਾ ਸਾਰਿਆਂ ਨਾਲ ਬਾਹਰੋਂ ਬਾਹਰੋਂ ਪਿਆਰ ਹੈ ਬਾਹਰ ਬਾਹਰ ਦੁਰੀ ਸੱਚ ਮੰਨਦਾ ਦੂਜੇ ਪਾਏ ਐਸੇ ਦੀ ਭੁੱਖ ਐ ਵਾਇਆ ਦੀ ਉਹ ਭੁੱਖ ਐ ਦੂਜੇ ਪਾਏ ਪਿਆਰ ਅਣਹੋਦਾ ਆਪ ਮੈਂ ਗੁਰੂਆਂ ਆਪਣੇ ਆਪ ਨੂੰ ਕਹੀ ਜਾਂਦਾ ਇਹਨੇ ਖੋਦ ਖਾ ਬੇਵਜਲ ਵਿੱਚ ਹੈ ਨਹੀਂ ਉਹ ਗੁਰੂਆਂ ਦੇ ਵਿੱਚ ਸੰਤਾ ਚ ਆਪਣੇ ਆਪ ਨੂੰ ਗਿਲਦਾ ਪਰ ਹੈ ਜੀ ਅਣਹੋਦਾ ਆਪ ਗਣਾਏ ਮਾਰ ਕਰੇ ਖੋਰ ਕਿਆ ਮਾਰ ਦੇਣਾ ਖਾਰੀ ਹੋਣੀ ਐ ਕਈ ਵਾਰ ਵਰਖੀਆਂ ਬਣਾਉਦੇ ਨੇ ਪਿੱਛੋਂ ਕਿ ਮਰੇ ਨੇ ਕਾਹੀ ਵਰਖੀਆਂ ਬਰਉਦੇ ਨੇ ਜੇ ਮਰਦੇ ਹੀ ਨੇ ਵਰਖੀ ਕਿਹਨੇ ਬਰਉੜੀ ਤੇ ਅਸੀਂ ਮੰਨਣਾ ਹੀ ਨਹੀਂ ਵਰਖੀ ਕਾਦੀ ਹੈ ਠੀਕ ਹੈ ਜੀ ਨਾਨਕ ਕਿਸ ਆਖੀ ਹੈ ਜਹ ਆਪੇ ਬਖਸ਼ਣ ਹਾਰ ਆਹ ਕਹੇ ਦੇ ਅੱਗੇ ਖੜੀਏ ਬਖਸ਼ਣ ਤਾਂ ਆਪੇ ਹੀ ਹੈ ਪਰਮੇਸ਼ਰ ਬਖਸ਼ਣ ਕੋਈ ਬਖਸ਼ਣ ਕੋਈ ਆਦਮੀ ਦੀ ਗੁਰੂ ਹੈ ਇਹ ਸਮੇਂ ਕਿਹੜਾ ਆਪੇ ਬਖਸ਼ ਹਾਂਜੀ ਪੌੜੀ ਤੂੰ ਕਰਤਾ ਸਭ ਕੁਝ ਜਾਣਦਾ ਸਭ ਜੀ ਤੁਮਾਰੇ ਕਿਸ ਮੇਲ ਲੈ ਕਿਆ ਜਨਤ ਵਿਚਾਰੀ ਤੂੰ ਤਾਂ ਕਰਤਾ ਸਭ ਕੁਝ ਜਾਣਦਾ ਜੀ ਸਾਰੇ ਜੀ ਤੇਰੇ ਕਰਤਾ ਸਭ ਕੁਝ ਜਾਣਦਾ ਅਸੀਂ ਤਾਂ ਗੱਲਾਂ ਕਰਦੇ ਹਾਂ ਦੱਸਦੇ ਹਾਂ ਭਈਆ ਐਂ ਨੇ ਕਰਦੇ ਨੇ ਰੋਗ ਤੈਨੂੰ ਪਤਾ ਹੀ ਹੈ ਦਸਰੂਆਂ ਵਾਸਤੇ ਗੱਲ ਕੀਤੀਆਂ ਨੇ ਦੱਸਿਆ ਵੀ ਪਬਲਿਕ ਨੂੰ ਸੁਝਾਉਣ ਵਾਸਤੇ ਗੱਲ ਆ ਕੋਤ ਤੇ ਆ ਵੀ ਐਂ ਕਰਦੇ ਨੇ ਉਹ ਆਪਣਾ ਆਪ ਨੇ ਕਿਆ ਮਾਰ ਕੇ ਠੀਕ ਹੈ ਜੀ ਜਿਸ ਤੂੰ ਭਾਵ ਤੂੰ ਮੇਲ ਲੈ ਕਿਆ ਜੰਤ ਵਿਚਾਰੀ ਜਿਹੜਾ ਤੂੰ ਚੰਗਾ ਲੱਗ ਜਾਂਦਾ ਜਿਹੜਾ ਤੇ ਆ ਜਾਦਾ ਜੇਲਾ ਤੇਰੇ ਨਾਲ ਪ੍ਰੇਮ ਕਰਦਾ ਤੂੰ ਮਿਲ ਲੈਣ ਤਦ ਭਾਜਨ ਇਹ ਜਨ ਤੇ ਵਿਚਾਰੇ ਕਾਦੇ ਜੋ ਨਾਇਨਾ ਆਪਣੇ ਆਪ ਤੈਨੂੰ ਮਿਲ ਸਕਦੇ ਨੇ ਨਾਇਨਾ ਕੋਈ ਦੀ ਬੁੱਧੀ ਹੈ ਨਾਇਨਾ ਕੋਈ ਦੀ ਕੋ ਸ਼ਕਤੀ ਹੈ ਤੂੰ ਕਰਨ ਕਰਨ ਹੈ ਸੱਚ ਸਿਰਜਣਹਾਰੇ ਜਿਸ ਤੂੰ ਮੇਲੇ ਪਿਆਰਿਆ ਸੋਤੁਦ ਮਿਲੇ ਗੁਰਮੁਖ ਵਿਚਾਰੇ ਤੂੰ ਕਲਨ ਕਾਰਨ ਸੁਪਰਧਨ ਸੱਚ ਸਿਰਜਣ ਹਾਰੇ ਇਹ ਸੱਚ ਸਿਰਜਣ ਹਾਰੇ ਸਭ ਕੁਝ ਤੂੰ ਹੀ ਕਲਨ ਕਾਰਨ ਸੁਪਰਧਨ ਹੋਰ ਕੋਈ ਦੱਸਣ ਤੇ ਸਕਦਾ ਪਾਣੇ ਅਸੀਂ ਜੋ ਮਰਜ਼ੀ ਕਹਿੰਦੇ ਰਹੀਏ ਮੈਂ ਕਰਤਾ ਉਹ ਨਿਉ ਕਰਤਾ ਉਹ ਕਰਤਾ ਫਜ਼ੂਲ ਹੈ ਕੋਈ ਸਿਰਜਣ ਹਾਰਾ ਇਹ ਗੱਲ ਸੱਚੀ ਹੈ ਜਿਸ ਤੋਂ ਮਿਲਿਆ ਪਿਆਰੇ ਸੋਹਣ ਮਿਲਿਆ ਤੋਂ ਤੁੰਦ ਮਿਲਿਆ ਕੋਰਮਾ ਕੀ ਵਿਚਾਰ ਹੈ ਗੁਰਮੁਖ ਨੇ ਤਾਂ ਇਹ ਵਿਚਾਰਿਆ ਜਿਹਨੂੰ ਪਹੁੰਚਣਾ ਹੈ ਉਹੀ ਤੇਰੇ ਨਾਲ ਮਿਲ ਕੋਈ ਵੀ ਤੇਰੇ ਨਾਲ ਨਹੀਂ ਕਰ ਸਕਦਾ ਕੋਈ ਯਤਨ ਕਿੰਨੇ ਸਮਾਧੀਆਂ ਲਾ ਲਵੇ ਕਿੰਨੇ ਕੋਈ ਜਗ ਕਰ ਲਵੇ ਕਿੰਨੇ ਕੋਈ ਦਾਨ ਕਰ ਲਵੇ ਕੁਝ ਵੀ ਕਰ ਲਵੇ ਨਹੀਂ ਮਿਲ ਸਕਦਾ ਤੇਰੇ ਨਾਲ ਜਿੰਨਾ ਜਤਨ ਤੂੰ ਵੀ ਚੁੱਕਾ ਠੀਕ ਹੈ ਜੀ ਹਾਂ ਬਲਿਹਾਰੀ ਸਤਿਗੁਰ ਆਪਣੇ ਜਿਨ ਮੇਰਾ ਹਰ ਅਲਖ ਲਖਾਰੇ ਮੈਂ ਤਾਂ ਬਲਿਹਾਰ ਜਾਣੂ ਗੁਰਬਾਣ ਜਾਨਾ ਆਪਣੇ ਸਤਿਗੁਰ ਤੁ। ਸਤਿਗੁਰ ਆਪੜ ਜਿਨ ਮੇਰਾ ਹਾਲ ਅਲਖ ਲਖਾਰੇ ਮੈਨੂੰ ਤਾਂ ਮੇਰਾ ਅਲਖ ਹਾਰੇ ਉਹਨੇ ਦਿਖਾਤਾ ਮੈਂ ਤਾਂ ਉਸਨੂੰ ਸਰਬਾਨ ਜਾਨਾ ਮੈਨੂੰ ਕੁਛ ਨਹੀਂ ਕਰਨਾ ਪਿਆ ਮੈਨੂੰ ਇਹ بڑے بڑے ਜਾਗ ਕਰਨੇ ਪਏ ਉਹ ਲੋਨੀ ਬੜੇ ਬੜੇ ਦਾਮ ਚਾਲਨੇ ਪਏ ਬਨੂਲੀ ਬੜੇ ਬੜੇ ਪੀਰ ਤੇ ਆਤਰਾ ਕਰਨੀ ਪਈ ਮੈਨੂੰ ਕੁਛ ਨਹੀਂ ਕਰਾ ਥੋੜੀ ਤਪ ਕਰਨੇ ਪਏ ਮੈਨੂੰ ਨਹੀਂ ਪੁੱਛਿਆ ਲੜਕਣਾਂ ਨੇ ਮੈਨੂੰ ਐਸੀ ਗੱਦੀ ਸਮਝਾਈ ਉਹ ਮੈਨੂੰ ਦਰਜਣ ਹੋ ਗਿਆ ਮੇਰੀ ਬੁੱਢੀ ਦਾ ਵਿਗਾਸ ਕਰਤਾ ਜੇਰੀ ਬੁੱਢੀ ਦਾ ਹੀ ਵਿਗਾਸ ਐਨਾ ਕਰਤਾ ਤੇ ਉਹਦੇ ਬਦਲਤੀ ਗੱਦੂ ਸਮਝਾਉਂ ਠੀਕ ਹੈ ਇੱਥੇ 8ਵੀਂ ਪੌੜੀ ਦੀ ਸਮਾਪਤੀ ਹੈ ਜੀ